ਸ਼ਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਸੋ ਧਨ ਮਿੱਤਰ ਨ ਏ ਜਿੱਥੇ ਸਿਰ ਚੂਟਾਂ ਖਾਈ ਜਿਹੜੀ ਸ਼ਰਮ ਹੁੰਦੀ ਆ ਸ਼ਰਮਖੰਡ ਦੀ ਬਾਣੀ ਹੈ ਨਾ ਸ਼ਰਮਖੰਡ ਦੀ ਬਾਣੀ ਉੱਥੇ ਆਉਂਦੀ ਆ ਜਿੱਥੇ ਅਸੀਂ ਕੁਝ ਕਹਿਣਾ ਕੱਲਣੀ ਹੁੰਦੀ ਹੈ ਧਰਮ ਦੀ ਕਹਿਣਾ ਕੱਲੀਏ ਤਾਂ ਉਹ ਹਿਰਦੇ ਚ ਬੈਠ ਕੇ ਹੁੰਦੀ ਆ ਸਰਮ ਧਰਮ ਦੋ ਇਨਾਨ ਦਾ ਜੇ ਕੁਝ ਪੱਲੇ ਪਿੰਦਾ ਨਾ ਨ ਗਿਆਨ ਥੋੜੇ ਤਾਂ ਗਿਆਨ ਨੂੰ ਕਹਿੰਦੇ ਫੇ ਥੋੜੀ ਜੀ ਧਰਮ ਦੀ ਹਾਲਨਾ ਖਾਲੀ ਹੋਈ ਸਕਾਰਥ ਹੈ ਜੇ ਗਿਆਨ ਨਹੀਂ ਪੱਲੇ ਤੇ ਆ ਕੁਝ ਸਮਝੇ ਨਹੀਂ ਆਈ ਸੋਜੀ ਹੋਈ ਫਿਰ ਸਰਮ ਧਰਮ ਦਾ ਜਿਹੜਾ ਤਰਮ ਤਰਮ ਤਾਪੂ ਦੀ ਜਾਊਗੀ ਤੇਰਾ ਜੀ ਤਾਂ ਖਬੂਰ ਹੈ ਜੇ ਤੁਹਾਡੇ ਧਰ ਪੱਲੇ ਪਵੇ ਗਿਆਨ ਤੁਹਾਨੂੰ ਗਿਆਨ ਆਤਮ ਜੇ ਤੁਹਾਨੂੰ ਹੁੰਦਾ ਫੇਰ ਉਹ ਘਾਲਣਾ ਤੁਹਾਡੀ ਸਕਾਰਥ ਅਜੇ ਸ਼ਰਮ ਪੜਨਾ ਕਿਰੋ ਸ਼ਰਮ ਪੜਨਾ ਨਹੀਂ ਪੂਰਾ ਸ਼ਰਮ ਨਹੀਂ ਆਪਾਂ ਪੜ ਸਕਦੇ ਰਾਰਾ ਅੱਧਾ ਦੀ ਨਹੀਂ ਨਹੀਂ ਇਹਨਾਂ ਨੇ ਬਹੁਤ ਜਗ੍ਹਾ ਅੱਧੇ ਰਾਰੇ ਦੀ ਜਗ੍ਹਾ ਪੂਰੇ ਰਾਰੇ ਵੀ ਲਾਏ ਹੈ ਤੇ ਤਾਂ ਮੈਂ ਪੁੱਛਦਾ ਜਿਵੇਂ ਵਰਤ ਨੂੰ ਵਰਤ ਨੂੰ ਆਪਾਂ ਵਰਤ ਉਹ ਸ਼ਾਸਤਰੀ ਬੋਲੀ ਹੈ ਸਾਡੀ ਗੁਰਮੁਖੀ ਬੋਲੀ ਹੈ ਪਰ ਉਹਨਾਂ ਨੇ ਵਰਤ ਲਿਖਿਆ ਹੋਇਆ ਹੈ ਨਾ ਬਹੁਤ ਜਗ੍ਹਾ ਆਪਾਂ ਗੁਰਬਾਣੀ ਦੇ ਅਨਸਾਰੇ ਚੱਲਣਗੇ ਆਪਾਂ ਮਿੱਤਰ ਨਾ ਮੰਨਿਓ ਤੁਸੀਂ ਇਹ ਮਰਨ ਨਹੀਂ ਹੈਗਾ ਇਹਦੇ ਨਾਲ ਸਿਰ ਤੇ ਜੋਟ ਪੈਣੀ ਆ ਜਦੋਂ ਡੰਡ ਲੱਗਣਾ ਇਹਦੇ ਤੇ ਜੰਮ ਦਾ ਡੰਡਾ ਇਹ ਤਾਂ ਨਾਲਿਆਂ ਦਾ ਹੀ ਲੱਗਣਾ ਜਿਹੜੇ ਆਪਣੇ ਨਾਲ ਖੜਾ ਹੋਵੇ ਬੰਦਾ ਇੱਕ ਸਾਡੇ ਸਿਰ ਤੇ ਡੰਡਾ ਪਵੇ ਉਹ ਮਿੱਤਰ ਹੈ ਸਾਡਾ ਦੁਸ਼ਮਣ ਹੈ ਉਹ ਤਾਂ ਦੁਸ਼ਮਣ ਆ ਮਾਇਆ ਦਾ ਤਾਂ ਤਾਂ ਦੁਸ਼ਮਣ ਆ ਆਡੀ ਪਰਪਲ ਮਾਇਆ ਮਾਇਆ ਦਾ ਵਿਰੋਧ ਕਰਦੀ ਆ ਤੁਹਾਡਾ ਰਾਹ ਰੋਕਦੀ ਆ ਇਹ ਨਹੀਂ ਜਾਣ ਦੇਣਾ ਸਾਨੂੰ ਅੱਗੇ ਮਿੱਠੇ ਵਸਾ ਕੇ ਰੱਖੂਗੀ ਇਹਨੂੰ ਮਿੱਤਰਾਂ ਦਾ ਡੰਡੀ ਹੈ ਮਿੱਤਰਾਂ ਦੀ ਦਿੱਤੀ ਜਿਹੜੀ ਇਹਨੂੰ ਮਨ ਲਜਾਈਦਾ ਘਾਲੂ ਕਿਉਂ ਜਿੱਤ ਸਿਰ ਚੋਟਾਂ ਖਾਏ ਦੀ ਵਜ੍ਹਾ ਨਾਲ ਚੋਟ ਪਈ ਹੈ ਡਾਕਾ ਇਸੇ ਤੇ ਪੈਦਾ ਇਹ ਡਾਕੂ ਆਊਗਾ ਸਸਰ ਤੇ ਚੋਟ ਪਾਉਗੀ ਇਹ ਡਾਕੂਆਂ ਤੋਂ ਵੀ ਭੱਜ ਚਲੋ ਜੱਬ ਦਾ ਪੈ ਜਾਊਗਾ ਹਾਂਜੀ ਜਿਨ ਕੈ ਪੱਲੇ ਧੰਵਸ ਹੈ ਤਿੰਨ ਕਾ ਫਕੀਰ ਜਿਨ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਹੁਣ ਆ ਗਿਆ ਧੰਦੀ ਗੱਲ ਤਾਂ ਜਿਹੜਾ ਨਾਮ ਧੰਨਾ ਉਹਦੀ ਗੱਲ ਗੁਰਬਾਣੀ ਦਾ ਜਿਹੜਾ ਨਾਮ ਲੈਣਾ ਸਮਝਿਆ ਹੋਇਆ ਸਾਡਾ ਪੋਜ਼ਿਟਿਵ ਧੰਦੀ ਗੱਲ ਆ ਗਈ ਗੁਰਬਾਣੀ ਦਾ ਤਾਂ ਜੀ ਦੇ ਜਿਹਨੂੰ ਗੁਰਬਾਣੀ ਦੀ ਸੋਝੀ ਆ ਵੀ ਜਾਵੇ ਜੀ ਜਿਨਕੇ ਪੱਲੇ ਧੰਬਸ ਹੈ ਤਨਕਾ ਨੌ ਫਕੀਰ ਇਹ ਸਮਝ ਲਓ ਫਕੀਰ ਫਕੀਰ ਨੇ ਮਾਇਆ ਨਹੀਂ ਹੈ ਉਹਨਾਂ ਦੇ ਕੋਲ ਫਕੀਰ ਉਹ ਹੁੰਦਾ ਹੈ ਜਿਹੜਾ ਮਾਇਆ ਦੀ ਭੁੱਖ ਨਹੀਂ ਦੇ ਵਿੱਚ ਇਹ ਫਿਕਰ ਹੈ ਫਕੀਰ ਦੇ ਵਿੱਚ ਉਹ ਕਹਿੰਦਾ ਆਹਨ ਚਿੰਤਾ ਮਤ ਕਰੋ ਚਿੰਤਾ ਤੇ ਉਹ ਫਕੀਰ ਹੈ ਫਿਕਰ ਤੋਂ ਅਗੇ ਉਹ ਫਕੀਰ ਹੈ ਸਿਰਫ ਫਕੀਰ ਸੀ ਮੁਸਲਮਾਨਾਂ ਦੇ ਵਿੱਚ ਮੁਸਲਮਾਨ ਧਰਮ ਇੱਥੇ ਤੱਕ ਤੁਹਾਨੂੰ ਲੈ ਜਾਂਦਾ ਇਹਦਾ ਮਤਲਬ ਕਹਿਣ ਦਾ ਇਹ ਹੈ ਮੁਸਲਮਾਨ ਫਕੀਰ ਤੋਂ ਜਾਦਾ ਡਿਗਰੀ ਨਹੀਂ ਹੈ ਮੁਸਲਮਾਨਾਂ ਦੇ ਵਿੱਚ ਫਖਰ ਬਣਾ ਦਿੰਦਾ ਇਹ ਪਰ ਜਿੰਦਗੇ ਵੇਰਦੇ ਤੂੰ ਬਸੈਂ ਉਹ ਤੇ ਪੱਲੇ ਐ ਤੇ ਹਿਰਦੇ ਐ ਜਿੰਦਗੇ ਹਿਰਦਾ ਤੂੰ ਬਸੈਂ ਜਿਹਦੇ ਹਿਰਦੱਚਾ ਨੇ ਤੂੰ ਆਪ ਵਸੇ ਲੋਕਾਂ ਚ ਵੇ ਕੇ ਨਾਲ ਗੁਣੀ ਦੀ ਉਹ ਫਕੀਰ ਤੋਂ ਅਗਲੀ ਡਿਗਰੀ ਗੁਣੀ ਦੀ ਦੀ ਐ ਕੋਈ ਨਹੀਂ ਹੀਰ ਗੁਰੂ ਨਾਨਕਾ ਫਕੀਰ ਵੀਣਾ ਵੀਰ ਹੈ ਵੀਣਾ ਮੇਰ ਨੂੰ ਜੇ ਸਮਝ ਆਈ ਗੱਲ ਉਨੇ ਬਨ ਲੈ ਅਬ ਹਾਂ ਤੂੰ ਘਾ ਮੈਂ ਪਿਛਾਂ ਜਿਵੇਂ ਜਿਹਨੇ ਫਕੀਰ ਹੋਏ ਨੇ ਹੋਰ ਗੁਰਮਤਿ ਨਾਲ ਸੰਬੰਧ ਹੋਏ ਨੇ ਜਿਹੜੇ ਆਦਮੀ ਮੁਸਲਮਾਨ ਸੀ ਬੰਦਾਰ ਸੀ ਜਿਹੜੇ ਚਾਹ ਬੁੱਧੂ ਸ਼ਾਹ ਸੀ ਹੋ ਚਾਹ ਗੁੱਢਣ ਸ਼ਾਹ ਸੀ ਹੋ ਚਾਹ ਜਿਹਨੂੰ ਇਹ ਕਹਿੰਦੇ ਨੇ ਪਹਾੜ ਰੋੜਤਾ ਸੀ ਉਹ ਵੀ ਐਵੇਂ ਗੱਲਾਂ ਨੇ ਪਹਾੜ ਰੋੜਤਾ ਸੀ ਉਹ ਵੀ ਗੁਰਨਾਨ ਕਦਾ ਸ਼ਿਸ਼ ਬਣਿਆ ਗੁਰਨਾਨ ਕੂਲੇ ਬਹੁਤ ਤਾਂ ਮੁਸਲਮਾਨਾਂ ਨੇ ਬਹੁਤ ਜ਼ਿਆਦਾ ਦਿੱਤੀ ਹੈ ਗੁਰਨਾਨਕ ਜਿਆਦਾ ਮੁਸਲਮਾਨ ਦੋਈ ਬੋਲਦਾਰੀ ਜੋ ਫਕੀਰ ਸੀ ਉਹ ਵਕਈ ਜਦੋਂ ਫਕੀਰ ਹੁੰਦਾ ਮਾਇਆ ਤੋਂ ਪਰੇ ਚਲਾ ਜਾਂਦਾ ਉਹ ਚਾਹੀਦਾ ਹੁੰਦਾ ਜਿਹੜੀ ਗੱਲ ਉਹ ਬੰਨ ਲੈਂਦਾ ਜਿਨ੍ਹਾਂ ਨੇ ਵਿਰੋਧ ਕੀਤਾ ਉਹ ਫਕੀਰ ਨਹੀਂ ਸੀ ਮੁਸਲਮਾਨ ਉਹ ਸ਼ਰੀਅਤ ਤੋਂ ਬੰਦੇ ਸੀ ਉਹ ਉਹ ਸੀਗੇ ਸ਼ਰਈ ਜਿਹੜਾ ਫਕੀਰ ਹੁੰਦਾ ਸ਼ਰੀਅਤ ਤੋਂ ਉੱਪਰ ਚਲਾ ਜਾਂਦਾ ਉਹ ਗੁਣਾ ਦੇ ਖਜ਼ਾਨੇ ਬਣ ਜਾਂਦੇ ਨੇ ਗੁਣ ਸਾਗਰ ਦੇ ਵਿੱਚ ਗੁਣੀ ਨਿਧਾਨਾ ਤੁਮ ਸਾਹਿਬ ਉਹ ਗੁਣਾ ਦੇ ਨਿਧਾਨ ਦੇ ਵਿੱਚ ਉਹਨਾਂ ਦੇ ਸਮੁੰਦਰ ਚ ਡੁੱਬ ਜਾਂਦੇ ਨੇ ਗੁਣ ਗੌਂਦੇ ਗੌਂਦੇ ਗੁਣਵਾਨ ਸਮਾ ਜਾਂਦੇ ਨੇ ਠੀਕ ਹੈ ਜੀ ਤੂੰ ਕੀ ਦੇ ਬਾਰੇ ਆਇਆ ਜੀ ਜਿੰਨ ਕਾ ਹਿਰਦੇ ਤੂੰ ਵਸੈ ਇਹ ਹੁਣ ਪ੍ਰਭ ਦੀ ਗੱਲ ਹੋ ਰਹੀ ਹੈ ਨਾਮ ਵਾਸਤੇ ਪ੍ਰਭ ਵਾਸਤੇ ਨਹੀਂ ਪ੍ਰਭ ਤਾਂ ਆਪ ਹੁਕਮ ਨੂੰ ਗਿਆ ਜਿਨ੍ਹਾਂ ਦੇ ਹਿਰਦੇ 'ਚ ਹੁਕਮ ਪ੍ਰਗਟ ਹੋ ਜਵੇ ਕਿਹੜਾ ਗੁਰੂ ਕੀ ਸੀ ਅੱਛਾ ਇਹਨਾਂ ਨੂੰ ਚਾਰ ਪਦਾਰਥ ਮਿਲ ਗਏ ਜੀ ਹਾਂ ਚਾਰ ਪਦਾਰਥ ਤੇ ਜਿਹੜੇ ਪਿਛਲੇ ਸੀਗੇ ਉਹਨਾਂ ਕੋਲ ਦੋ ਪਦਾਰਥ ਆ ਜਿਹੇ ਹਾਂ ਜੀ ਹਾਂ ਉਹਨਾਂ ਕੋਲ ਦੋ ਪਦਾਰਥ ਠੀਕ ਹੈ ਜੀ ਕੀ ਜਿਹੜੇ ਬੰਦੇ ਨੇ ਤੋਂ ਮੁਕਤ ਨਹੀਂ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀ ਐ ਜਾਇਨ ਲੱਗੈ ਦੁਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁਖ ਦੁਨੀਆ ਦਾ ਦੁੱਖ ਪਹਿਲਾ ਕਰਨ ਵਾਲੀ ਚੀਜ਼ ਆ ਜਿਹੜੇ ਦੁਨੀਆ ਦੇ ਸੁਆਭੀ ਆਦਮੀ ਨੇ ਉਹਨਾਂ ਦੇ ਅੰਦਰ ਰੋਜ਼ ਨਵੇਂ ਤੇ ਨਵੇਂ ਦੁੱਖ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਤੋਂ ਕੁ ਸਹਿਰ ਦੇ ਨੇ ਜਿੰਨਾ ਕੋਈ ਵੱਡਾ ਬਣਦਾ ਹੈ ਉਨੀ ਦੁੱਖ ਜ਼ਿਆਦਾ ਨੇ ਬੜੇ ਬੜੇ ਜੋ ਦੀਤਿਆਂ ਲੋਭ ਤਿਲ ਕੋ ਵਿਆਪਾ ਚਿੰਤਾ ਰੋਗ ਜਿਆਦਾ ਲੱਗਾਂ ਦੁੱਖ ਜਿੰਨਾ ਜਿੰਨਾ ਦੁਨੀਆ ਦੇ ਅੰਦਰ ਨੂੰ ਉਹ ਅੰਦਰ ਨੂੰ ਜਾਂਦੇ ਨੇ ਜਿੰਨਾ ਜਿੰਨਾ ਦੁਨੀਆ ਦੇ ਵਿੱਚ ਖਚੇ ਦੁਲਦੇ ਜਾਂਦੇ ਨੇ ਉਹ ਨਹੀਂ ਦੁੱਖ ਵਧੇ ਚਲੇ ਜਾਂਦੇ ਜੇ ਜਾਂ ਜਾਂਦੇ ਨੇ ਨਾ ਜਾਇਤਾ ਲੱਗਾਂ ਦੁੱਖ ਛੱਡਣਾ ਦੁਨੀਆਂ ਨੂੰ ਵੀ ਉਹਨਾਂ ਵਾਸਤੇ ਦੁੱਖ ਦਾ ਹੈ ਭੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨੂੰ ਲੱਤੀ ਭੁਖ ਨਾਨਕ ਕਹਿੰਦਾ ਨਾਮ ਤੇ ਭਿਰੋ ਸੱਚੇ ਨਾਮ ਬਿਨਾ ਕਿਸੇ ਦੀ ਭੁਖ ਨਹੀਂ ਲੱਤੀ ਸੰਸਾਰ 'ਚ ਕਿਸੇ ਨੇ ਵੀ ਦੁਨੀਆਂ ਖੁਸ਼ੀ ਨਾਲ ਨਹੀਂ ਛੱਡੀ ਖੁਸ਼ੀ ਨਾਲ ਦੁਨੀਆਂ ਨੂੰ ਛੱਡਣਾ ਜਿਹੜਾ ਆਪਣੀ ਇੱਛਾ ਨਾਲ ਛੱਡਣਾ ਦੁਨੀਆਂ ਨੂੰ ਇਹ ਨਾਮ ਤੋਂ ਬਿਨਾ ਸੰਭਵ ਨਹੀਂ ਅਜੇ ਤੱਕ ਹੋਇਆ ਕਿ ਕਿਹਦਾ ਵੀ ਬਣ ਫਲ ਪੱਕੇ ਭੋਲ ਗਿਰੇ ਜਿਵੇਂ ਜ ਬਣਦਾ ਹੈ ਦਰਖਤ ਦਾ ਫਲ ਜੇ ਪੱਕ ਜਾਂਦਾ ਬਿਲਕੁਲ ਫਿਰ ਆਪੇ ਦਰਖਤ ਨੂੰ ਛੱਡ ਦਿੰਦਾ ਹੈ ਤੇ ਗਿਰ ਜਾਂਦਾ ਕਿਉਂ ਛੱਡਦਾ ਉਹ ਜਿਹੜਾ ਆਦਮੀ ਸੰਤੋਖੀ ਹੁੰਦਾ ਹੈ ਹੁੰਦਾ ਉਹ ਐਸ ਸੰਸਾਰ ਨੂੰ ਐਸ ਸਰੀਰ ਨੂੰ ਤਿਆਗ ਦਿੰਦਾ ਹੈ ਕਿਉਂ ਠੀਕ ਹੈ ਜੀ ਸਰੀਰ ਤਿਆਗਦਾ ਮਾਇਆ ਦਾ ਹਾਂ ਜੀ ਰੂਪੀ ਭੁਖਣਾ ਉਤਰਿਆ ਕਿਆ ਦੇਖਾਂ ਤਾਂ ਧੁਖ ਜੀਤੇ ਰਾ ਸਰੀਰ ਕੇ ਤੇਤੇ ਲੱਗੈ ਦੁਖ ਇਹਦੇ ਰਾਜੇ ਮਹਾਰਾਜੇ ਹਜੰਦ ਨੇ ਬੜੇ ਆਦਮੀ ਹਜੰਦ ਦੇ ਦੁਨੀਆਬੀ ਆਦਮੀ ਹੁੰਦੇ ਨੇ ਉਹ ਰੂਪ भी ਦੇ ਵਿੱਚ ਜਿੱਥੇ ਵੀ ਉਹਨਾਂ ਨੂੰ ਜਨਾ ਲੱਗਦਾ ਹੈ ਜਿਹੜੀ ਵਿੱਚ ਇਹ ਉਹਨਾਂ ਨੂੰ ਤਸੰਦ ਹੁੰਦੀ ਹੈ ਉਹ ਕੱਠੀ ਕਰੀ ਜਾਂਦੇ ਆ ਜਾਂ ਲਾਤਾ ਜਾਏ ਜਦ ਇਹਦਾ ਜਾਂਦਾ ਤੇ ਲਾਤਾ ਜਾਂਦਾ ਸਕੀਵਨ ਵਿੱਚ ਬਿੰਦੀ ਲੱਗਦੀ ਚਾਕੇ ਇਹਦਾ ਮਤਲਬ ਇਹਨਾ ਬਿਲਕੁਲ ਗਿਆਨ ਦੀ ਗੁਰਬਾਨੀ ਦਾ ਸੀਗਾ ਇਹਨਾਂ ਲੋਕਾਂ ਨੇ ਐਵੇਂ ਜਾਂ ਇੱਕ ਬਿੰਦੀ ਥੋਕਤੀ ਚੱਕ ਜਾਂ ਦੇਖੋ ਜਦ ਦੇਖਦਾ ਦੇਖਾ ਮਨੀ ਦੇਖਾ ਲਖ ਜਾਂ ਦੇਖਾ ਜਦ ਦੇਖਿਆ ਉਹਨੇ ਜਿੱਥੇ ਵੀ ਦੂਦੀ ਨਿਕਾ ਗਈ ਹੈ ਜਾਂ ਕੋਈ ਨਮਾ ਰੂਪ ਦੇਖਿਆ ਤਾਂ ਭੁਖ ਤਾਂ ਨੂੰ ਬਿੰਦੀ ਠੀਕ ਹੈ ਚਲੋ ਆ ਉਹਦੇ ਅੰਦਰ ਨਵੇਂ ਰੂਪ ਨਹੀਂ ਭੁੱਖ ਜਾ ਇਸ ਤਰੀਕੇ ਨਾਲ ਰਾਣੀਆਂ ਬੇਲਤ ਕੱਠੀਆਂ ਲੈਂਦੇ ਸੀ ਰਾਜੇ। ਉਧਰ ਹੀ ਛਾਰਾ ਇਸ ਗੱਲ ਦਾ। ਹਾਂਜੀ। ਜੇ ਤੇਰਾ ਸਰੀਰ ਕੇ ਤੇਤੇ ਲੱਗਣ ਦੁੱਖ। ਜੇ ਤੇਰਾ ਸਰੀਰ ਕੇ ਸਰੀਰ ਦੇ ਰਸਾਂ ਦੀ ਗੱਲ ਆ ਸਾਰੀ ਜਿੰਨੇ ਵੀ ਜ਼ਿਆਦਾ ਵਧਾ ਲਓਗੇ ਉਹ ਨਹੀਂ ਤੁਹਾਨੂੰ ਦੁੱਖ ਜ਼ਿਆਦਾ ਲੱਗ ਜਾਣਗੇ। ਇਹ ਸਾਰੇ ਜਾਣਦੇ ਹੀ ਨੇ। ਇਹ ਤਾਂ ਹੁਣ ਅੱਜ ਅੱਜ ਦੀ ਦੁਨੀਆ ਦੇ ਵਿੱਚ ਸਾਰੇ ਲੋਕ ਸਮਝਦੇ ਨੇ ਇਸ ਗੱਲ ਨੂੰ ਹਾਂ ਜੀ ਮਹਨਲਾ ਪਹਿਲਾ ਅੰਧੀ ਕੰਮੀ ਅੰਧ ਮਨ ਮਨ ਹੀ ਅੰਧ ਹੈ ਤਨ ਅੰਧ ਚਿਕੜ ਲਈਆਂ ਕਿਆ ਥੀ ਪੱਥਰ ਬੰਦ ਜਿਹੜਾ ਨਾ ਹੋ ਕੇ ਕੰਮ ਕਰਦਾ ਨਾ ਧਰਮ ਦੇ ਵਿੱਚ ਇਥੇ ਧਰਮ ਦੇ ਵਿੱਚ ਨਾ ਹੋ ਕੇ ਕੰਮ ਕਰਦਾ ਕਮ पहला शुरू करता ਗਿਆਨ ਜੋ ਹੈ ਨਹੀਂ ਸਾਡੇ ਧਰਮ ਕਰਮ ਕਰਮ ਧਰਮ ਦੀ ਕਰਮ ਦੇ ਵਿੱਚੋਂ ਧਰਮ ਦੀ नहीं ਨਹੀਂ ਹੋਣੀ ਧਰਮ ਸਿੱਖ ਕੇ ਗਿਆਨ ਸਿੱਖ ਕੇ करना है की नहीं करना ਨਹੀਂ ਕਰਨਾ ਉਹਦਾ ਪਤਾ ਲੱਗ ਪਹਿਲਾਂ ਗਿਆਨ ਹਾਸਲ ਕਰੋ ਕਮ ਫੇਰ ਸ਼ੁਰੂ ਕਰੋ ਕਮ ਪਹਿਲਾਂ ਸ਼ੁਰੂ ਕਰਦਾ ਗਿਆਨ ਹੈ ਹੀ ਨਹੀਂ ਹੁਣ ਆ ਵੀ ਨਹੀਂ ਹੈ ਅੰਦੀ ਕਮੀ ਅੰ내 ਬਿਨਾਂ ਸਮਝੇ ਬਿਨਾਂ ਵਿਚਾਰੇ ਅੰਧ ਭੜ ਕੋਈ ਨਹੀਂ ਪੀਆ ਮਨ ਵੀ ਇਹਨਾਂ ਉਹਨੂੰ ਅੰਧ ਬਾਨਾ ਵਲੀ ਅੰਦੇ ਵੰਦੇ ਵਿੱਚ ਜ ਹਨੇਰਾ ਨਾ ਜਾਂ ਵੰਦੇ ਵਿੱਚ ਗਿਆਨ ਤਾਂ ਸ਼ਰੀਰ ਕਰਕੇ ਵੀ ਇੰਨਾ ਹੀ ਬੰਦੀ ਹੋਊਗੀ ਇਸ ਬੇਸਤੇ ਗੁਰਬਾਨੀ ਅੰਨਾ ਕਹਿੰਦੀ ਆ ਉਹਨੂੰ ਅਸਲ ਚ ਅੰਦੇ ਇਹ ਨਾ ਅੱਖੀਆਂ ਜਿਨ ਮੁਖ ਲੋੜਨਾ ਹੈ ਅ ਜਿਨਾਂ ਦੇ ਮੱਥੇ ਤੇ ਅੱਖਾਂ ਨਹੀਂ ਹੰਸਦੇ ਉਹਨਾਂ ਨੂੰ ਅੰਨੇ ਲਈ ਕਹਿੰਦੀ ਗੁਰਬਾਣੀ ਅੰਦੇ ਸਹੀ ਨਾਨਕਾ ਜੋ ਖਸਮੇ ਕੁੱਥੇ ਛਾਏ ਜਿਨ੍ਹਾਂ ਨੂੰ ਖਸਮ ਦਾ ਪਤਾ ਵੀ ਨਾ ਲੱਗਿਆ ਸੱਚ ਦਾ ਗਿਆਨ ਨਹੀਂ ਹੋਇਆ ਆਪਣਾ ਮੂੜ ਦਾ ਗਿਆਨ ਨਹੀਂ ਹੋਇਆ ਉਹ ਅੰਲੇ ਦੇ ਗੁਰਬਾਣੀ ਦੀ ਭਾਸ਼ਾ ਇੱਥੇ ਅੰਨੇ ਦੀ ਜਿਹੜੀ ਡੈਫੀਨੇਸ਼ਨ ਆ ਦੇਤੀ ਇੱਥੇ ਉਹ ਤਨ ਕਰਕੇ ਵੀ ਅੰਦੇ ਅਸੀਂ ਉਹਨਾਂ ਨੂੰ ਮੰਨਦੇ ਆ ਗੁਰਬਾਣੀ ਧਰਮ ਦੀ ਦੁਨੀਆ 'ਚ ਤਨ ਕਰਕੇ ਇਹਨੇ ਉਹ ਬੰਦੇ ਜਾਂਦੇ ਨੇ ਜਿਹੜੇ ਅਗਿਆਨੀ ਦੇ ਜਿਹੜੇ ਬਿਨਾਂ ਸਮਝੇ ਵਿਚਾਰੇ ਧਰਮ ਦੇ ਗੱਲ ਵੀ ਸ਼ੁਰੂ ਕਰ ਲੇ ਮਾਲਾ ਫੇਰਨੀ ਸ਼ੁਰੂ ਕਰਤੀ ساری ਉਮਰ ਫੇਰਦੇ ਰਹੇ ਮਰਨ ਤੱਕ ਫੇਰਦੇ ਰਹੇ ਮਿਲਿਆ ਕੁਝ ਵੀ ਨਹੀਂ ਉਹ ਜੇ ਛੁੱਟ ਜਾਂਦੀ ساری ਉਮਰ ਸਕੂਲ ਚਾਈਦਾ ਐਸਾ ਕਾਲਜ ਸਕੂਲ ਨਹੀਂ ਜੇ ساری ਉਮਰ ਜਾਣਾ ਪਵੇ ਤੁਹਾਨੂੰ ਤੁਹਾਡਾ ਪੜਾਈ ਪੂਰੀ ਹੋ ਗਈ ਕੁਲ ਕੱਲ ਛੱਡਤਾ ਉਹਨਾਂ ਦੀ ਪੜਾਈ ਪੂਰੀ ਹੋਈ ਹੋਈ ਨਹੀਂ ਮਾਲਾ ਵਾਲਿਆਂ ਦੀ ਇਹਦਾ ਮਤਲਬ ਜੇ ਸਾਡੇ ਬੇੜੇ ਇੱਥੇ ਹੀ ਮਾਲਾ ਰੱਖੀਆ ਪੜਾਈ ਨਹੀਂ ਪੂਰੀ ਹੋਈ ਹੈ ਪ੍ਰਾਪਤੀ ਨਹੀਂ ਹੋਈ ਕੁਝ ਹਾਂਜੀ ਜੇ ਮਨੀ ਅੰਧੇ ਤਾਂ ਅੰਧ ਹਾਂ ਤਨ ਕਰਕੇ ਵੀ ਅੰਧ ਨੇ ਸਰੀਰ ਕਰਕੇ ਵੀ ਇਹ ਨਹੀਂ ਦੇ ਚਿੱਕੜ ਲਾਈ ਐ ਚਿੱਕੜ ਲਾਈ ਐ ਕਿੱਥੀ ਐ ਉਹ ਜੇ ਘਾਰਾ ਲਾ ਕੇ ਆਪਾਂ ਘਾਰਾ ਲਾਉਣ ਲੱਗੀ ਕੋਈ ਪਾਣੀ ਟੁੱਟ ਜਾਂਦਾ ਆਪਾਂ ਘਾਰਾ ਲਾਉਂਦੇ ਰੋ ਬੜਾ ਕੋਈ ਬੰਨ ਹੋਵੇ ਪੱਥਰ ਦਾ ਬੰਨ ਲਾਇਆ ਹੋਵੇ ਪਾਖੜਾ ਡੈਮੇਜ ਵੀ ਜੇ ਟੁੱਟ ਜਵੇ ਪਰ ਚਿੱਕੜ ਨਾ ਬੰਨ ਹੋ ਜੂਗਾ ਉਹ ਪੱਥਰ ਦਾ ਬੰਨ ਜਿੱਥੇ ਟੁੱਟ ਗਿਆ ਉਹ ਚਿੱਕੜ ਲਾ ਦੇ ਉਹ ਕੋਈ ਬੰਦ ਕਰੇ ਉਹ ਤਾਂ ਮੂਰਖ ਹੈ ਚੱਕੜ ਲਈ ਇਹ ਕਹਾਣੀ ਕੀ ਹੋ ਜੂਗਾ ਚੱਕੜ ਨੂੰ ਜੇ ਪੱਥਰ ਦਾ ਬੰਦ ਟੁੱਟ ਗਿਆ ਜਦੋਂ ਕਲਪਨਾ ਸ਼ੁਰੂ ਹੋਗੀ ਨਾ ਜਦੋਂ ਮਨ ਦੇ ਵਿੱਚ ਕਲਪਨਾ ਸ਼ੁਰੂ ਹੋਗੀ ਫਿਰ ਇਹ ਸਮਾਧੀ ਵਾਲਾ ਨਹੀਂ ਇਹ ਚੱਕੜ ਦੇ ਲੱਗਦਾ ਇਹਨੂੰ ਗਿਆਨ ਦਾ ਹੀ ਬੰਦ ਲੱਗਦਾ ਆ ਗਿਆਨ ਦਾ ਹੀ ਬੰਦ ਲੱਗਦਾ ਹੋਰ ਕਿਸੇ ਚੀਜ਼ ਦਾ ਬੰਦ ਨਹੀਂ ਲੱਗਦਾ ਕਹਿਣ ਦਾ ਮਤਲਬ ਮਨ ਨਹੀਂ ਰੁਕਦਾ ਆਪਣੀ ਵਿਚਾਰਤਾ ਰ ਜਿਹੜੀ ਮਨਮਤ ਦੀ ਵਿਚਾਰਤਾ ਰ ਨਹੀਂ ਰੁਕਦੀ ਬਿਨਾਂ ਸੱਚ ਦੇ ਗਹਿਨ ਤੋਂ ਪੱਥਰ ਦਾ ਬੰਦ ਟੁੱਟ ਗਿਆ ਇੱਕ ਵਾਰ ਫੇਰੋ ਚੱਕੜ ਨਾਲ ਨਹੀਂ ਦੂਰ ਹੋ ਸਕਦਾ ਚੱਕੜ ਨਾਲ ਨਹੀਂ ਬੰਦਿਆ ਜਾ ਸਕਦਾ ਮਨ ਪਾਣੀ ਨੂੰ ਉਸ ਨੂੰ ਬੰਦਾ ਫਲੋ ਨਹੀਂ ਰੋਕਿਆ ਜਾ ਸਕਦਾ ਠੀਕ ਹੈ ਜੀ ਪਾਣੀ ਵਿੱਚ ਨੂੰ ਤੇ ਨਾ ਫਰਮ ਗਿਆਨ ਤੇ ਹਾਂ ਜੀ ਬੰਦ ਟੁੱਟਾ ਢੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਬਿਨ ਕੇਤੇ ਡੁੱਬੇ ਸਾਥ ਬੰਦ ਟੁੱਟ ਜਾਵੇ ਉਹ ਬੇੜੀ ਹੁੰਦੀ ਕੋਈ ਤੁਲਾ ਬਣਾਇਆ ਹੁੰਦਾ ਤਾਂ ਵੀ ਚਲੋ ਤੇ ਪਾਣੀ ਦਾ ਤਰ ਤਰ ਨਾ ਤੁਲਾ ਨਾ ਹੱਥ ਨਾ ਕੋਈ ਤੁਲ ਹੈ ਨਾ ਕੋਈ ਉਹਦੀ ਥੱਲੇ ਸਾਡੇ ਪੈਰ ਲੱਗਦੇ ਨੇ ਕੋਈ ਬਾਸ ਲੱਗਦਾ ਐਡੀ ਡਹਿਰਾਈ ਹੈ ਫਾਬ ਨਹੀਂ ਉਹ ਪਾਣੀ ਦਾ ਕਿੰਨਾ ਡੂੰਗਾ ਹੈ ਆਦਮੀ ਚਲ ਤੁਰ ਕੇ ਵੀ ਜਾ ਸਕਦਾ ਐ ਕੋਈ ਹੋਰ ਸਾਧਨ ਨਾ ਹੱਥ ਨਾਂਕ ਸੱਚੇ ਲੋਕਲ ਕਿਤੇ ਡੁੱਬੇ ਸਾਥ ਇਸ ਕਰਕੇ ਨਾਵ ਤੇ ਬੈਠ ਹੁੰਦੀ ਸੀ ਤਰਿਆ ਜਾਣਾ ਨਾਵ ਦਾ ਜਹਾਜ਼ ਹੈ ਉਥੇ ਨਾਮ ਦੀ ਉਹ ਬੇੜੀ ਹੈ ਨਾਮ ਦਾ ਹੀ ਤੁਲਹਾ ਤੇ ਕਿੰਨੇ ਸਾਥ ਡੁੱਬ ਗਏ ਲੈ ਕੇ ਗਏ ਸਾਥ ਮਾਇਆ ਮਾਇਆ ਧਾਰੀਆ ਤੇ ਸਾਖਤਾ ਨੇ ਪੂਰਾ ਨੇ ਪੂਰ ਡਬੋਤੇ ਕਿ ਤੁਲਹਾਰ ਬੇੜੀ ਬੜਾਈ ਨਹੀਂ ਪਨ ਟੁਕਿਆ ਹੈ ਅਸੀਂ ਇਕੜ ਲਾਈ ਜਾਂਦੇ ਨੇ ਤੁਲਹਾ ਬੇੜੀ ਦੀ ਜ਼ਿਕਰ ਨਹੀਂ ਕਰਦੇ ਇਸ ਕਰਕੇ ਸਾਰੇ ਡੁੱਬਦੇ ਹੀ ਜਾਂਦੇ ਨੇ ਜਿੰਨੀਆਂ ਮਤਾਲੇ ਬਨ ਮਤਾਲੇ ਸਾਰੇ ਆਪਣੇ ਸਾਥੀਆਂ ਸਣੇ ਲੁਗਦੇ ਚਲੇ ਜਾ ਰਹੇ ਨੇ ਹਾਂਜੀ ਮਹੱਲਾ ਪਹਿਲਾ ਲਖਮਣ ਸੁਇਨਾ ਲਖਮਣ ਰੂਪਾ ਲਖ ਸਾਹਾ ਸਿਰ ਸਾਹ ਲਖ ਲਸ਼ਕਰ ਲਖ ਵਾਜੇ ਨੇਜੇ ਲੱਖੀ ਘੋੜੀ ਪਾਤਸ਼ਾਹ ਲਖਮਣ ਸੁਇਨਾ ਉਹ ਵੇ ਕੋਲ ਰਾਜਿਆਂ ਦੇ ਹੁੰਦਾ ਜਾਂ ਖਜ਼ਾਨਿਆਂ 'ਚ ਲਖਮਣ ਰੂਪਾ ਲਖਮਣ ਚਾਂਦੀ ਵੀ ਹੋਵੇ ਰੁਕਵਾ ਚੰਦੂ ਕਹਿੰਦੇ ਨੇ ਲੱਖ ਸ਼ਾਹ ਸਿਰ ਸ਼ਾਹ ਲੱਖਾਂ ਢਲੇ ਹੋ ਛੋਟੇ ਰਿਵਾੜੇ ਹੋਣ ਸ਼ਾਹ ਹੋਣ ਢਲੇ ਉਹਦੇ ਉਹਨਾਂ ਦੇ ਸਿਰ ਤੇ ਵੱਡਾ ਸ਼ੈਨ ਸ਼ਾਹ ਹੋਵੇ ਹੋ ਲੱਖ ਲਸ਼ਕਰ ਲੱਖਾਂ ਨਿਕਣ ਦੀ ਜ ਫੌਜ ਆਉਣ ਉਹਦੇ ਕੋਲ ਲੱਖ ਬਾਜੇ ਨੇ ਜੇ ਲੱਖਾਂ ਬਾਜੇ ਨੇ ਜੇ ਗੋਣ ਉਹਦੇ ਕੋਲ ਹਥਿਆਰ ਹੋਣ ਲੱਖੀ ਘੋੜੀ ਲੱਖਾਂ ਹੀ ਘੋੜੇ ਹੋਣ ਘੋੜੀ ਜੇ ਲਖਦਾਰ ਨੂੰ ਬਿੰਦੀ ਲਾ ਕੇ ਬੋਲਾਂਗੇ ਤਾਂ ਇਹ ਘੋੜੀ ਵੀ ਲਖਦਿਕ ਵਿੱਚ ਨਹੀਂ ਹੈ ਠੀਕ ਹੈ 39 ਲਖ ਆਇਆ ਹੈ ਘੋੜੀ ਘੋੜਿਆਂ ਦੇ ਨਾਲ ਘੋੜਿਆਂ ਸਾਹਿਬ ਪਾਸ਼ਾ ਹੋਵੇ ਠੀਕ ਹੈ ਘੋੜੇ ਦੀ ਫੈਮਨ ਘੋੜੀ ਨਹੀਂ ਹੈ ਘੋੜੇ ਦਾ ਪਲੂਰਲ ਘੋੜੀਆਂ ਹਾਂ ਦੇਖੋ ਇੱਥੇ ਹੁਣ ਇੱਥੇ ਬਿੰਦੀ ਲਾਈ ਦੀ ਉਹਨਾਂ ਨੇ ਠੀਕ ਹੈ ਜੀ ਇੱਥੇ ਲੋੜ ਦੀ ਇੱਥੇ ਲਾਈ ਨਹੀਂ ਅਲੱਖੀ ਲੱਖੀ ਨੂੰ ਵੀ ਬਿੰਦੀ ਨਹੀਂ ਲਾਈ ਲਕਿਨ ਵੀ ਬੋਲ ਬਜਨੇ ਹਾਂਜੀ ਜਿੱਥੇ ਸ਼ਾਇਰ ਲੰਗਣਾ ਅਗਨ ਪਾਣੀ ਅਸਗਾਹ ਕੰਦੀ ਦਿਸਣਾ ਆਵੇ ਤਾਹੀਂ ਪਵੇ ਕਹਾ ਜਿੱਥੇ ਸਾਦਰ ਆਜ ਮੇ ਲੰਗਣ ਨੂੰ ਅਗੇ ਐਸੇ ਰਾਜੇ ਨੂੰ ਕੋਲੇ ਵੀ ਹੋਰ ਇਹਨਾਂ ਧੰਨਵਾਲ ਵੀ ਹੋਵੇ ਜਿੱਥੇ ਥਾਗਣ ਸਾਗਲ ਅਗਨ ਪਾਣੀ ਅਸਗਾ ਅਗ ਵੀ ਬਹੁਤ ਤੇਜ ਹੋਵੇ ਗਏ ਸਿਰ ਤੇ ਸੂਰਜ ਦੀ ਅਸਗਾ ਸਮੁੰਦਰ ਹੋਵੇ ਹੋ ਉਹ ਪੈ ਜਵੇ ਲੰਗਣਾ ਕੰਨੀ ਦਸਣਾ ਆ ਵੀ ਦੂਏ ਪਾਸੇ ਕਿਨਾਰਾ ਵੀ ਨਾ ਹੋਵੇ ਵੀਦਾ ਨਾ ਹੋਵੇ ਸਾਗਰ ਦਾ ਦੂਏ ਪਾਸੇ ਇਨਾ ਸਾਗਰ ਹੋਵੇ ਦੂਆ ਪਾਸਾ ਪਤਾ ਹੀ ਨਹੀਂ ਕਿੱਥੇ ਹੈ ਜਿਸਨਾ ਆ ਗਈ ਪਵੇ ਕਹਾ ਉਧਰ ਤਾਂ ਹਾਈ ਵਾਰੂਗਾ ਹੋਰ ਵੀ ਕਰੂਗਾ ਉਹ ਰਾਜਾ ਐਡਾ بڑا ਇਹਨੇ ਲਸ਼ਕਰ ਲੈ ਕੇ ਘੋੜੇ ਲੈ ਕੇ ਇਹਨਾਂ ਸੋਨਾ ਇਕੱਠਾ ਕਰਕੇ ਸਭ ਕੁਝ ਕਰਕੇ ਉਹ ਧਾਹੀਂ ਮਾਰੂਗਾ ਵੀ ਹੁਣ ਕੀ ਕਰਾਂ ਹੁਣ ਤਾਂ ਡੁੱਬ ਜਾਣਾ ਮੈਂ ਐ ਜਿਵੇਂ ਲੰਘਣਾ ਉਹ ਤਾਂ ਧਾਹੀਂ ਰਊਗਾ ਹੋਰ ਕੁਝ ਨਹੀਂ ਕਰ ਸਕਦਾ ਹਾਂਜੀ ਨਾਨਕ ਉੱਥੇ ਜਾਣੀਏ ਸ਼ਾਹ ਕੋਈ ਪਾਤਸ਼ਾ ਕਹਿੰਦਾ ਉੱਥੇ ਕਿਹਦਾ ਸ਼ਾਹ ਪਾਤਸ਼ਾ ਦੀ ਗੱਲ ਪਤਾ ਲੱਗਦਾ ਉੱਥੇ ਜਾ ਕੇ ਕਹਿੰਦੇ ਯਾਦ ਆਉਂਦਾ ਵੀ ਉਹੋ ਨਾਨਕ ਦੀ ਗੱਲ ਨਾ ਮੰਨ ਲਈ ਸ਼ਾਹ ਕੋਈ ਪਾਦਸ਼ਾਹ ਜਿਹੜਾ ਸ਼ਾਹਾਂ ਸਿਰ ਸ਼ਾਹ ਇਹਨਾਂ ਹੋ ਉੱਥੇ ਉਹਦੀ ਲੋੜ ਮਹਿਸੂਸ ਹੁੰਦੀ ਆ ਫਿਰ ਪਛਤਾਉਂਦਾ ਵੀ ਆ ਜਿਹੜੇ ਮੇਰੇ ਇਹਨੇ ਖਜ਼ਾਨੇ ਨੇ ਇਹਨੇ ਮੇਰੇ ਘੋੜੇ ਨੇ ਇਹਨੇ ਮੇਰੇ ਕੋ ਸੈਨਾਪਤੀ ਨੇ ਇਹਨੇ ਮੇਰੇ ਥੱਲੇ ਹੋਰ ਰਾਜੇ ਨੇ ਜਵਾੜੇ ਨੇ ਇੱਥੇ ਤਾਂ ਹੁਣ ਕੋਈ ਕੁਝ ਨਹੀਂ ਕਰ ਸਕਦਾ ਜੇ ਕਿਸੇ ਨਾਨਕ ਦੀ ਗੱਲ ਮੰਨ ਲੈਂਦੇ ਉਹ ਗੱਲ ਕਬ ਹੋਉਦੀ ਇੱਥੇ ਹੁਣ ਫਿਰ ਕਹਿੰਦੇ ਯਾਦ ਆਉ ਥੋੜੇ ਸ਼ਾਹ ਕੋਈ ਪਾਦਸ਼ਾਹ ਤੋਂ ਕੀ ਭਾਬਣ ਜੀ ਕਿਆ ਦੱਸ ਤਾ ਕਹਿੰਦੇ ਫੇਰੇ ਗੁਰਮੁਖ ਦੀਆਂ ਗੱਲਾਂ ਸੁਣੀਆਂ ਹੋਈਆਂ ਤਾਂ ਹੁੰਦੀਆਂ ਹੀ ਨੇ ਪਹਿਲਾਂ ਨਸ਼ਾ ਹੁੰਦਾ ਨਾ ਮਾਇਆ ਦਾ ਘੋੜਿਆਂ ਦਾ ਥੱਲੇ ਲੌ ਲਕਿਰ ਦਾ ਰਾਜ ਦਾ ਉਹ ਵੀ ਨਜਾ ਉਤਰ ਜਾਣਾ ਪੈਂਦਾ ਕਿ ਇੱਦਾਂ ਮਾਫੀ ਮੰਗ ਲੈਂਦਾ ਦੂਰੇ ਦਿਨ ਜਾ ਕੇ ਖਰਾਬ ਜੇ ਗਾਲਾਂ ਕੱਢਦਾ ਸਾਰੇ ਪਿੰਡ ਨੂੰ ਹਾਂਜੀ ਪੌੜੀ ਕਿੰਨਾ ਗਲੀ ਜੰਜੀਰ ਬੰਦ ਰਬਾਣੀਏ ਬੰਦੇ ਛੁੱਟੇ ਸੱਚ ਸੱਚ ਪਛਾਣੀਏ ਆ ਤਾਂ ਜ਼ਿੰਦਾ ਹੀ ਕਹਤਾਂ ਹਾਂ ਕਨਾ ਗਲੀਆਂ ਦੇ ਜੀਦ ਬੰਦੀ ਰਿਵਾਨੀਆਂ ਆ ਮੂਰੇ ਤੁਹਾਡੇ ਆਗੂ ਬਣੇ ਹੋਏ ਰਹਿ ਵਰ ਉਹਨਾਂ ਦੇ ਵੀ ਗੱਲ ਜੀ ਜੀਰਾਨ ਤਹਾਂ ਪਈ ਹੋਈਆਂ ਉਹ ਬੰਦੇ ਉਹ ਵੀ ਉਸੇ ਚੰਜੀਰ ਨਾਲ ਜਾਣੇ ਨੇ ਜਿਹੜੀ ਨਾ ਹੱਥਕੜੀ ਉਹੀ ਲੱਗਣੀ ਹੈ ਜਾਂ ਡਿਸਟਰ ਵੀ ਹੋਵੇ ਜਾਂ ਹੱਥਕੜੀ ਲੱਗਣੀ ਉਹ ਜਿਹੜੀ ਇੱਕ ਮਮੁੱਲੀ ਆਦਮੀ ਨੇ ਲੱਗਣੀ ਹੋਈ ਹੱਥਕੜੀ ਉਹਦੇ ਵਾਸਤੇ ਨਾ ਵੱੱਦਾ ਛੁੱਟ ਸੱਚ ਸੱਚ ਪਛਾੜੀਏ ਇਹ ਬੰਦੇ ਕਾਜਾ ਨਾ ਛੁੱਟਣਗੇ ਸੱਚ ਨਾਲ ਛੁੱਟਣਗੇ ਸੱਚ ਦੇ ਬਿਨਾ ਨਹੀਂ ਛੱਡਣਾ ਕਿਸੇ ਨੇ ਫਟ ਇਸ ਕਰਕੇ ਸੱਚ ਨੂੰ ਪਛਾਣਨ ਦੀ ਲੋੜ ਹੈ ਸੰਸਾਰ ਵਿੱਚ ਸਾਰੇ ਬੰਦੇ ਹੋયા ਜੀਰਾ ਪਈਆਂ ਹਲੇ ਦੀਂਦੀਆਂ ਨਹੀਂ ਜੀਰਾ ਦੀਂਦੀਆਂ ਨਹੀਂ ਜੀਰਾ ਕਾਦੀਆਂ ਨਹੀਂ ਨਾਨਕਾ ਔਗਣ ਜੇ ਤੜੇ ਤੇਤੇ ਗੜਿੰਦੇ ਜਿਨੇ ਔਗਣ ਨੇ ਸਭ ਜੀਰਾ ਨੇ ਕੋਈ ਦੇਖ ਲੋ ਆਪਣੇ ਅੰਦਰ ਝਾਕ ਕੇ ਜੇ ਉਹ ਗੁਣ ਹੈ ਤਾਂ ਜੀਰ ਹੈ ਉਹਨੂੰ ਕੱਟ ਲੋ ਜੇ ਗੁਣ ਹੋਏ ਤਾਂ ਕੱਟੀਏ ਤੇ ਭਾਈ ਸੇ ਵੀਰ ਜਿਹੜੇ ਗੁਣਾਂ ਨਾਲ ਕੱਟ ਲੈਣਗੇ ਜੀਜੀਆਂ ਨੂੰ ਔਗਣਾਂ ਨੂੰ ਬਿਟਾ ਲੈਣਗੇ ਉਹ ਛੁੱਟ ਜਾਣਗੇ ਹਾਂਜੀ ਲਿਖਿਆ ਪੱਲੇ ਪਾਏ ਸੋ ਸੱਚ ਜਾਣੀ ਐ ਹੋਏ ਨਿਵੇੜ ਗਿਆ ਜਾਣੀ ਐ ਲਿਖਿਆ ਪੱਲੇ ਪਾਏ ਓ ਲਿਖ ਕੇ ਆਪ ਵੀ ਤੂੰ ਇਹ ਲਿਆਇਆ ਸੀ ਇਹੀ ਤੈਨੂੰ ਯਾਦ ਕਰਾਇਆ ਕਿ ਇੱਤਾ ਹੀ ਕਰਾਉਂਦੀ ਹੈ ਬਾਣੀ ਇਹੀ ਲਿਖ ਕੇ ਲਿਆ ਤਾਂ ਉਹਨੇ ਇੱਥੇ ਆ ਕੇ ਭੁੱਲ ਗਿਆ ਤੇ ਪੱਲੇ ਪਾਏ ਜੋ ਲਿਖ ਕੇ ਲਿਆ ਸੀ ਉਹੀ ਪੱਲੇ ਪਾ ਉਹੀ ਨਾਮ ਜਿਹੜਾ ਸੱਚ ਨੂੰ ਪਛਾਣ ਲਾ ਸੱਚ ਪਛਾਣਨਾ ਹੀ ਲਿਖ ਕੇ ਪੱਲੇ ਲਾਇਆ ਸੀ ਇਹ ਸੱਚ ਨੂੰ ਪਛਾਣ ਕੇ ਹੀ ਲਿਖਿਆ ਪੱਲੇ ਪਊਗਾ ਸੱਚ ਜਾਣੀ ਹੈ ਇਸ ਕਰਕੇ ਸੱਚ ਨੂੰ ਜਾਣਣ ਦੀ ਲੋੜ ਹੈ ਜੇ ਲਿਖਿਆ ਪੱਲੇ ਪਉਣਾ ਤਾਂ ਸੱਚ ਨੂੰ ਜਾਣ ਲੈ ਕੀ ਹੈ ਸੱਚ ਦੁਨੀਆ ਦਾ ਹੁਕਮੇ ਹੋਏ ਨਵੇੜ ਕਿਆ ਜਾਣੀਏ ਹੁਕਮ ਨਾਲ ਨਵੇੜ ਪਰਪਤਾ ਜਲ ਲਗੂਗਾ ਜਾਂ ਅੱਗੇ ਜਾਵੇਂਗਾ ਹੁਣ ਤੈਨੂੰ ਪਤਾ ਹੈ ਤਨ ਹੁਣ ਬੰਦਣ ਨੂੰ ਤਿਆਰ ਨਹੀਂ ਹੋ ਜਾਣਾ ਤਿਆਰ ਜਦੋਂ ਲਗੂਗਾ ਕਿ ਨਵੇੜਾ ਹੁਕਮ ਨਾਲ ਹੁੜੇ ਪਰਮੇਸ਼ਰ ਦੇ ਹੁਕਮ ਨਾਲ ਹੁੜੇ ਨਵੇੜਾ ਕਿਆ ਜਾਣੀਏ ਇੱਥੇ ਦੀ ਪਤਾ ਲੱਗੂਗਾ ਜਦ ਜਾਏਗਾ ਕਿਹਾਂ ਜਾ ਪਤਾ ਲੱਗੂਗਾ ਪਵਜਲ ਤਾਰਨਹਾਰ ਸ਼ਬਦ ਪਛਾਣੀਐ ਚੋਰ ਯਾਰ ਜੁਵਾਰ ਪੀੜੇ ਕਹਾਣੀਐ ਪਵਜਲ ਤਾਰਨਹਾਰ ਸ਼ਬਦ ਪਛਾਣੀਐ ਆ ਜਿਹੜਾ ਸ਼ਬਦ ਆ ਨਾ ਗੁਰੂ ਦੇ ਏਸਾ ਗੁਰਬਾਣੀ ਐ ਛੇ ਪਵਜਲ ਤੂ ਤਾਰਨਹਾਰ ਐ ਇਹਨੂੰ ਪਛਾਣ ਲਓ ਇਹਦੇ ਵਾਲੀ ਚੀਜ਼ ਐ ਕੁਛ ਪਣ ਵਾਲੀ ਚੀਜ਼ ਨਹੀਂ ਐ ਇਹ। ੁੱਝਣ ਵਾਲੀ ਚੀਜ਼ ਐ ਜੋ ਪਛਾਣੋ ਇਹਨੂੰ ਬੁੱਝੋ ਇਹਨੂੰ ਸਮਝੋ ਕੋਖੋ ਖੋਜੋ ਇਹਨੂੰ ਪਛਾਣ ਲਓ ਵੀ ਇਹੀ ਪੌਜਲ ਤਾਲ ਨਾਲੀ ਚੀਜ਼ ਜੇ ਇਹ ਮੰਨ ਲਿਆ ਤੁਸੀਂ ਪਛਾਣ ਲਿਆ ਫਿਰ ਸ਼ਾਇਦ ਤੁਸੀਂ ਪੌਜਲ ਤਰ ਸਕਦੇ ਹੋ ਫਿਰ ਤਾਂ ਤੁਸੀਂ ਲੱਗ ਸਭ ਕੁਝ ਛੱਡ ਕੇ ਲੱਗ ਜੂਗੇ ਇਧਰੇ ਫਿਰ ਉਹ ਸਭ ਕੁਝ ਜਾਂਦਾ ਇਧਰੇ ਲੱਗ ਜਾਂਦਾ ਫਿਰ ਉਹ ਜਿਹਨੇ ਪਛਾਣ ਲਿਆ ਹਾਂਜੀ ਚੋਰ ਜਾਰ ਜੁਆਰ ਪੀੜੇ ਕਹਾਣੀ ਹੈ ਜਿਹੜੇ ਚੋਰ ਜਾਰ ਜੁਆਰ ਨੇ ਉਹ ਤਾਂ ਕਹਾਣੀ ਪੀੜੇ ਜਾਣੇ ਹੀ ਨੇ ਉਹ ਉਹ ਨੇ ਉਹ ਵੀ ਧਰਮ ਕਾਦਮੀ ਨਹੀਂ ਦੇਖੋ ਇੱਥੇ ਧਰਮ ਕਾਦਮੀ ਨੂੰ ਕਿਹਾ ਦੂਜਿਆਂ ਨੂੰ ਨਹੀਂ ਕਿਹਾ ਜੋਰ ਨੇ ਜੂਆ ਜੂਆਰ ਕਰਦੇ ਨੇ ਜੂਆ ਸੰਸਾਰੀ ਨਹੀਂ ਖੇਡਦੇ ਉਹਨਾਂ ਨੇ ਜੀਵਨ ਨੂੰ ਜੂਆ ਜਹਾਰਤਾ ਜੋ ਜਾਰ ਜੁਆਰ ਨੇ ਜੂਏ ਜੀਵਨ ਜੂਏ ਤੇ ਲਾਇਆ ਹੋਇਆ ਮਾਇਆ ਵਾਸਤੇ ਪੀੜੇ ਕਹਾਣੀ ਹੈ ਕਹਾਣੀ ਪੀੜੇ ਜਾਣਗੇ ਦਿਲ ਪੀੜੇ ਕਹਾਣੀ ਇਜ਼ਰਾਇਲ ਫਰੈਸਤਾ ਤੇ ਦਿਲ ਪੀੜੇ ਕਹਾਣੀ ਗੁਰਬਾਣੀ ਟੌਪ ਕਲਾਸ ਦੇ ਜਿਹੜੇ ਧਾਰਮਿਕ ਆਦਮੀ ਨੇ ਉਹਨਾਂ ਨਾਲ ਉਹਨਾਂ ਕਰ ਰਹੀ ਹੈ ਆਮ ਜਿਹੜੇ ਲੋਕਾਂ ਦੇ ਗੁਰੂ ਬਣੇ ਹੋਏ ਨੇ ਆਮ ਆਦਮੀ ਦਾ ਕੀ ਆਮ ਆਦਮੀ ਨੂੰ ਤਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਉਹ ਤਾਂ ਉਹਨਾਂ ਦੇ ਕਹੇ ਕਰ ਰਹੇ ਨੇ ਕੁਝ ਹਾਂਜੀ ਨਿੰਦਕ ਲਾਇਤ ਬਾਰ ਮਿਲੇ ਹੜ ਵਾਣੀਐ ਗੁਰਮੁਖੀ ਸੱਚ ਸਮਾਏ ਸੋ ਦਰਗਾ ਬਿਲਕੁਲ ਨਖਾਰ ਕੇ ਗੱਲ ਕਰਤੀ ਦਿੰਦਕ ਦਿੰਦਕ ਕੌਣ ਨੇ ਜਿਹੜਾ ਡੁਪਲੀਕੇਟ ਰੱਬ ਬਣਾਇਆ ਰਿਹਾ ਨੇ ਜਿਹੜੇ ਆਪਣੇ ਆਪ ਨੂੰ ਰੱਬ ਦੇ ਬਰਾਬਰ ਮੰਨਦੇ ਨੇ ਜਿਨ੍ਹਾਂ ਨੇ ਆਦਮੀ ਨੂੰ ਜੰਮਿਆ ਹੈ ਨੂੰ ਰੱਬ ਬਣਾ ਦਿੱਤਾ ਉਹ ਦਿੰਦਕ ਨੇ ਜਦਿਆ ਕੀ ਨਹੀਂ ਹੋ ਰਹੀਆ ਜਦਿਆ ਹੋ ਰਹੀਆ ਪਰਮੇਸ਼ਰ ਦੀ ਉਹਨੂੰ ਘਟੀਆਂ ਬਣਾ ਉਹਨੂੰ ਉਹਨੂੰ ਗਾਇਬ ਕਰਤਾ ਆਦਮੀ ਉਹਦੇ ਚੂਰੇ ਖੜਾ ਕਰਤਾ ਲਾਇਤ ਬਾਦ ਇਹ ਦਿੰਦਕ ਨੇ ਇਹਨਾਂ ਦਾ ਅਤਵਾਲ ਦੀ ਹੈ ਦਰਗਾਹ ਇਹਨਾਂ ਤੇ ਕੋਈ ਭਰੋਸਾ ਨਹੀਂ ਕਰ ਲਿਆ ਦੁਨੀਆ ਭਰੋਸਾ ਚਾਹੇ ਕਰਦੀ ਹੋਵੇ ਸਰਦਾਰ ਦੇ ਵਿੱਚ ਇਹ ਲਾਟ ਮਾਰਦੇ ਜਿਨ੍ਹਾਂ ਦੀ ਕੋਈ ਗੱਲ ਭਰੋਸੇਯੋਗ ਨਹੀਂ ਹੈ ਮਲੇ ਹੜਵਾਣੀਆਂ ਨੇ ਇੱਕ ਤਾਂ ਬਾਣੀਆਂ ਹੁੰਦਾ ਇੱਕ ਹੜਵਾਣੀਆਂ ਨੇ ਇਹ ਤਾਂ ਮਾਇਆ ਦੇ ਵਪਾਰੀ ਨੇ ਹੜਵਾਣੀਆਂ ਇਹਨਾਂ ਨੇ ਲਿਖਿਆ ਵੀ ਹੱਥਾਂ ਨੂੰ ਹਥਕੜੀ ਲਾਈ ਹੁੰਦੀ ਹੈ ਆਹਾਂ ਇਹ ਤਾਂ ਸਾਰੇ ਮਾਇਆ ਦੇ ਬਾੜੀ ਨੇ ਮਾਇਆ ਦੇ ਗਰਥੇ ਹੋਏ ਨੇ ਮਾਇਆ ਦੇ ਗ੍ਰਸਥ ਵਿੱਚ ਦੇ ਬੱਦੇ ਹੋਏ ਮਾਇਆ ਦੀ ਗ੍ਰਸਥ ਵਿੱਚ ਆਮ ਦੇ ਵਪਾਰੀ ਨਹੀਂ ਹੈ ਹੈ ਮਾਇਆ ਦੇ ਗਰਥੇ ਹੋਏ ਨੇ ਗੁਰਮੁਖੀ ਸੱਚ ਸਮਾਏ ਉਹ ਜਾਣੀ ਆਹ ਕਿਹਨੇ ਗੁਰਮੁਖ ਨੇ ਇਹ ਹੜਵਾਣੀਆਂ ਤਾਂ ਉਲਟੇ ਗੁਰਮੁਖ ਗੁਰਮੁਖ ਸੱਚ ਸਮਾਏ ਉਹ ਸੱਚਿਤ ਸਮਾਏ ਨੇ ਨੇ ਉਹ ਮਾਇਆ ਦੇ ਸਮਾਏ ਹੋਏ ਨੇ ਸੱਚ ਸਮਾਏ ਤੋ ਦਰਗਾਹ ਜਾਣ ਉਹ ਦਰਗਾਹ ਦੀ ਜਾਣਕਾਰੀ ਵੀ ਰੱਖਦੇ ਨੇ ਉਹਨਾਂ ਨੇ ਦਰਗਾਹ ਬਾਰੇ ਕੁਝ ਜਾਣਕਾਰੀ ਦਿੱਤੀ ਹੈ ਗੁਰਮੁਖੀ ਨਹੀਂ ਆ ਦਰਗਾਹ ਦੀ ਉਹ ਜਾਣਕਾਰੀ ਹੈ ਦਰਗਾਹ ਦੀਆਂ ਨਾਨਕ ਆਖਣਾ ਹੈ ਨੇ ਉਹਨਾਂ ਦਾ ਅਤਵਾਰ ਕੋਈ ਨਹੀਂ ਹੈ ਗੁਰਮੁਖਾਂ ਦੀ ਗੱਲ ਦਾ ਅਤਵਾਰ ਹੈ ਉੱਥੇ ਗੁਰਮੁਖ ਕਿਉਂਕਿ ਗੁਰਮੁਖ ਆਪਣੇ ਕੋਲੋਂ ਕਹਿੰਦੇ ਹੀ ਨਹੀਂ ਕੁਝ ਦਰਗਾਹ ਦਾ ਜੋ ਫਰਮਾਨ ਉਸੇ ਦੀ ਵਿਆਖਿਆ ਕਰਦੇ ਨੇ ਕੋਈ ਪੈਦੇ ਕੋਈ ਕਹਿੰਦੇ ਨੇ ਜੋ ਹੁਕਮ ਹੈ ਮੈਂ ਕਹ ਰਿਹਾ ਸਾਬ ਪਾਓ ਜੀ ਉਹ ਜਦ ਮੈਂ ਜੋ ਕਹਿ ਉਹ ਤਾਂ ਹੁਕਮ ਕੇ ਹੈ ਨਾ ਸਰਕਾਰ ਦਾ ਹੁਕਮ ਕੀ ਹੈ ਉਹ ਹੀ ਦੱਸਿਆ ਗੁਰਮਖਾਨ ਨੇ ਆਪਣੇ ਕੋਲ ਦੱਸਿਆ ਹੀ ਕੁਝ ਠੀਕ ਹੈ ਜੀ ਇੱਥੇ 21ਵੀਂ ਬੋਡੀ ਦੀ ਸਮਾਪਤੀ ਹੈ ਜੀ ਹਾਂ